ਆਦਿਕੇ ਸੰਗੀ ਸੁਣੋ ਹਰ ਨਾਉ ਸਾਧ ਕਾ ਸੰਗੀ ਸੁਣੋ ਹਰ ਨਾਉ ਜੇ ਨਾਮ ਤੁਸੀਂ ਸੁਣਨਾ ਹੈ ਪਹਿਲਾਂ ਆਪਣੇ ਮਨ ਸਾਧ ਲਓ ਜੇ ਮਨ ਤੇ ਕੈਨੇ ਨਾਉ ਲਾ ਕੇ ਬਹਿਣਾ ਨੀ ਸੁਣਦਾ ਨਹੀਂ ਧਿਆਨ ਨਹੀਂ ਲਾਉਂਦਾ ਫੇਰ ਦੀ ਕੋ ਨਾਮ ਸੁਣਦੇ ਪਹਿਲਾਂ ਵੀ ਸੰਗੀ ਸਾਧ ਲੈਣਾ ਉਹ ਨਾਲ ਉਹ ਤੇੱਕੇ ਬਿੜਾਉਣਾ ਪੈਣਾ ਹੀ ਆ। ਸਾਵਧਾਨ ਗਾਗਰ ਜੀ ਦਾ ਹੁਣ ਬੈਣੀ ਆ। ਹਾਂ? ਸਾਵਧਾਨ ਗਾਗਰ ਜੀ ਦਾ ਹੁਣ ਬੈਣੀ ਆ। ਫੇਰ ਕਿ ਨੂੰ ਸਾਹ ਕਹ ਕੇ ਕੋਣ। ਫੇਰ ਬਾਣੀ ਪੜੋ ਆਪ। ਕੋਣ ਗਾਇਨ ਬਾਣੀ ਪੜੀਏ। وجالو وہ گونتی جائے سا دیا گیا پھر وہ گہراں میں بگا دے پر حالے دا آلو ائی پڑھ لو پھر جس من ٹھیکے پڑدا ہے جو راسو جیو بے تانہ پڑدا ہے है تو منہ چ पढ़ी جاندے پتہ है, है जे جے एक چٹ ہو کے پانی پڑدا ہے ٹھیکے پھرے تو کچھ ہن کو پلٹ پئی ਜੇ ਪੜਵਾ ਤੇ ਪੜ੍ਹਨਾ ਦਾ ਪੜ੍ਹਨ ਨਾਲ ਬੜਾ ਬੜ ਨਾਲ ਤਿਆਰ ਵੀ ਹੋਣਾ ਹੈ ਨੌਕਰੀ ਤੇ ਵੀ ਜਾਣਾ ਸਿਰੋ ਟੇਪਰ ਦਾ ਜੇ ਸੁਣਦੋ ਚੰਗੀ ਆਹ ਬੋਰਡ ਨਹੀਂ ਪੜਾ ਲੱਗਣਾ ਮੈਂ ਕੀ ਬੋਲਦਾ ਟੇਪਰ ਜਿਹੜੀ ਉਹ ਸੁਣ ਜਾਵੇ ਨਾਲ ਤਿਆਰ ਹੋ ਜਾ ਉਹ ਸੁਣ ਲੂਗਾ ਹਾਂ ਪਤਾ ਹੁੰਦਾ ਪੜ੍ਹ ਕਰੀ ਜਾਂਦਾ ਜਵਾਨੇ ਪਤਾ ਨਹੀਂ ਪੜੀ ਜਾਂਦਾ ਪਰ ਤੇ ਉਸ ਨੂੰ ਵੀ ਠੀਕ ਹੋ। ਹਾਂ। ਸਾਧਕੇ ਸੰਗੀ ਨਾ ਮਨ ਤੇ ਵਿਸਰੇ। ਸਾਧਕੇ ਸੰਗੀ ਨਾ ਮਨ ਤੇ ਵਿਸਰੇ। ਜਦੋਂ ਮਨ ਸਾਧਕ ਦਾ ਫਿਰ ਮਨ ਤੇ ਵਿਸਰਦਾ ਹੀ ਨਹੀਂ। ਫਿਰ ਸੱਚ ਮੰਤੋਂ ਵਿਸਰਦਾ ਹੀ ਨਹੀਂ। ਸੱਚ ਖਰਾਕ ਬਣ ਜਾਂਦਾ। ਅਮਲ ਹੋ ਬੈਠੇ ਸਦਾ ਨਸ਼ਾ ਹੋ ਬੈਸਰਦਾ। ਆਪਣੇ ਕੋਲ ਹੈ ਜੈਸੇ ਬਲਵਾਲਾ। ਜੈਸੇ ਮਹਿਮਾਨਾ ਭਈਆ। ਰਾਮਦੇਵ ਜੀ ਸਭ ਨੂੰ ਆਵਦੇ ਕੋਈ ਕੁਛ ਨਾ ਹੋਵੇ ਜਦੋਂ ਚਲਿਆ ਨਾ ਬਾਹਰ ਨੂੰ ਦੂਏ ਪਿੰਡ ਨੂੰ ਜੇ ਕੋਰਤਾ ਬਲੇ ਤਾਂ ਪਹਿਲੇ ਛਾਤੀ ਤੇ ਹੱਥ ਕੇ ਦਰ ਡੱਬੀ ਹੈਗੀ ਹੋਰ ਘੁਸਰਾ ਹੋਵੇ ਜੇ ਡੱਬੀ ਉਹ ਤੇਰੇ ਕਿ ਉਹਦਾ ਜਾਨ ਉੱਧੀ ਰਹੇਗੀ ਇਸ ਲੋਕ ਦੇ ਵੀ ਬਸਰ ਜਿਵੇ ਕੋਈ ਚਿੰਤਾ ਦਾ ਇਲਾਜ ਹੋਵੇ ਕੋਈ ਤਕਲੀਫ ਦਾ ਇਲਾਜ ਹੋਵੇ ਉਹ ਤੇ ਪਰੇਸ਼ਾਨੀ ਨਾਮ ਤੇ ਜਿਹਦੀ ਪਰੇਸ਼ਾਨੀ ਦਾ ਇਲਾਜ ਨਾਮ ਹੈ ਉਹ ਤਾਂ ਜਿਹਦੀ ਚਿੰਤਾ ਦਾ ਰਾਜੇ ਨਾਮ ਹੈ ਉਹ ਤਾਂ ਤੁਸੀਂ ਆਪਣੀ ਨੇ ਚਿੰਤਾ ਪਰੇਸ਼ਾਨੀ ਦਾ ਇਲਾਜ ਹੈ ਇਹ ਦੂਵੇ ਉਡੀ ਦੇ ਚਿੰਤਾ ਤਾਂ ਕਹਿ ਜਿਹਾ ਜਿਹਾ ਮੁੰਡੀ ਕੋ ਕਾਸੀ ਮਰਮਾ ਬੇਰੀ ਜੰਤਾ ਬੇਰੀ ਬਰੇ ਘੱਟੀ ਇਹਦਾ ਦੂਰ ਹੁੰਦੀ ਅਮਲ ਵੀ ਉਦੋਂ ਦੂਰ ਹੁੰਦੇ ਬਰਬਰ ਦੀ ਗੱਲ}{|\text{ਸੰਸਾਰ ਦੇ ਚੀਜ਼ਾਂ ਸਾਡੀ ਜਿਹਦਾ ਸੰਸਾਰ ਨਾਲ ਕੋਈ ਰਿਸ਼ਤਾ ਨਹੀਂ ਅਮਲ ਨਾਲ ਰਿਸ਼ਤਾ ਸੰਸਾਰ ਛੱਡਿਆ ਹੋਇਆ ਹੁਣ}{|\text{ਛੋੜੀ ਇਹ ਗੱਲਾਂ ਹਾਂ ਉਹਦੇ}} ਅਹਮਲ ਦੇ ਖਰਾਬ ਨੇ ਲੋਬ ਜਿਹੜੇ ਮਾਇਆ ਦਾ ਦੀਨ ਹੁਣ ਤੇ ਮਾਇਆ ਮੁਝ ਕਰ ਕੋ ਹੋਏ ਨੇ ਉਹਨੇ ਆਪ ਘਰ ਕੇ ਨੇ ਨਾ ਘਰ ਕੇ ਰਹਿਣਾ ਚਾਹੁੰਦੇ ਨੇ ਘਰ ਕੇ ਦੁਨੀਆ ਰੱਖਣਾ ਚਾਹੁੰਦੇ ਨੇ ਮਾਇਆ ਬਹੁਤ ਆਗਾ ਚਾਹੁੰਦੇ ਹੀ ਈ ਲੋਕ ਨੇ ਸਾਰੇ ਜਿਹੜੇ ਕੋਈ 10 ਰੁਪਏ ਖਰਾਬ ਰਹਿਣ ਉਸ ਦਾ 20 ਖਰਾਬ ਰ ਉਹ ਪਤਾ ਸਾਨੂੰ ਨਹੀਂ ਨੇ ਅਸਾਂ ਇਹ ਬੰਦੇ ਲੈ ਜਾਂਦੇ ਨੇ ਕੁਝ ਮਰਦਾ ਹੋਵੇ ਤੋਂ ਇਤੋਂ ਵੱਧ ਪਰਖੇਤੀ ਜਨਨ ਬਚ ਗਈ। ਕਿ ਉਹਨਾਂ ਲੋਕਾਂ ਦਾ ਪ੍ਰਚਾਰ ਹੈ ਗੁਰਮੰਦਾਸ ਦਾ ਪ੍ਰਚਾਰ ਨਹੀਂ ਹੈ। ਉਹਨਾਂ ਦਾ ਸੱਚ ਹੈ ਉਹਦੀ ਗੱਲ। ਇੱਕ ਸੱਚ ਨੂੰ ਸਿੱਟ ਕਰਨ ਵਾਸਤੇ ਤਾਂ ਮੇਰੇ ਮਨ ਦਾ ਮਈਆ ਮੇਰੇ ਰੁਪਿਆਤ ਕਮੇ ਆ ਉਹਦਾ ਪ੍ਰਮਾਣ ਹੈ ਨਹੀਂ ਕਿਤੇ ਵੀ ਲਿਵਾਗ ਰੋਟੀ। ਦੂਜਾ ਕੋਈ ਪ੍ਰਮਾਣ ਦੱਸੋ। ਜੇ ਬੜੇ ਗੱਲ ਨੂੰ ਸੁਣਿਆ ਆਂ ਚਾਕੇ ਦੇਖਤਾ ਉਹਦੀ ਵਸਤਾ ਦੇ ਖੋਪੀ ਐ ਸਭ ਕੁਝ ਛੱਡਿਆ ਹੋਇਆ ਰੋ ਛੱਡ ਕੇ ਦਿਖਾਓ ਬਿਨਾਂ ਬਲ ਤੋਂ ਕੁਝ ਛੱਡ ਕੇ ਰੋ ਆਪੇ ਨਾ ਛੱਡੂਗਾ ਹੋਰ ਕੋਈ ਰਸਤਾ ਹੈਗਾ ਤਾਂ ਨਾਮ ਨਾ ਛੱਡਦਾ ਐ ਆਮ ਨਾ ਛੱਡਦਾ ਕੋਈ ਹੜੇ ਹੜਿਓਗਾ ਵੀ ਕਿਦੂ ਸਾਹ ਹੜਿਓਗ ਮੇਰਾ ਸਾਹ ਧੋਮ ਮੇਰਾ ਸਾਹ ਘੋਮ ਮੇਰਾ ਸਾਹ ਇਹ ਵੀ ਦੀ ਪਰ ਉਹ ਮੇਰੇ ਦੂਜੇ ਉਹ ਦੂਜੇ ਬਸੰਨ ਚਾਹ ਦੀ ਜਣਾਉਂਦੇ ਹੋ ਸਾਹ ਨਾਲ ਜੁੜੇ ਹੋਇਆਂ ਦੇ ਵਿੱਚ ਨਹੀਂ ਹੋ ਸਾਰੂ ਸੰਗੀ ਸਰਪਰ ਨਿਸ਼ਤਰ ਹੈ ਸਾਧ ਸੰਗੀ ਸਰਪਰ ਨਿਸ਼ਤਰ ਹੈ ਜਿਹੜਾ ਸਾਥ ਦੀ ਸੰਗਤ ਹੈ ਕਰਦਾ ਹੈ ਉਹਦਾ ਦਰਨਾ ਨਿਸ਼ਚਿਤ ਹੈ ਸਰਪਰ ਨਿਸ਼ਤਰ ਹੈ ਕੋਈ ਨਾ ਉਸ ਤੋਂ ਹੋਇਆ ਸਰਪਰ 70% ਸਰਪਰ ਦਾ ਮੰਨ ਲਓ ਇਹ ਵੀ ਨਾ ਕੋਈ ਸ਼ੰਕਾ ਵਾਲੀ ਗੱਲ ਨਹੀਂ ਹੈ ਉਸ ਸਰਪਰ ਯਾਨੀ ਜੇਲਾ ਸਾਥ ਦੀ ਸੰਗਤ ਕਰਨ ਵਾਲਾ ਹੈ ਜੇ ਮਨ ਕਰਕੇ ਸੰਗਤ ਕਰਦਾ ਤਾਂ ਸਰੂਗੋ ਸੰਗਤ ਬਣ ਕਰਕੇ ਕਦੀ ਉਹ ਤੋਂ ਰੱਬ ਦੋਈ ਨਹੀਂ ਸੀ ਦੇਖੋ ਉਹ ਉਹ ਗੱਲ ਇੱਥੇ ਆ ਕੇ ਮਿਲਿਆ ਬਲੀਏ ਨਾ ਮਿਲੇ ਮਿਲੇ ਜੇ ਮਿਲਿਆ ਹੋਏ ਆਏ ਸੰਗਤੋ ਤੇ ਬਿਨਿਏ ਵਿਲਿਆਣ ਜਿਹੜੇ ਆਪਣੇ ਨਾਲ ਇੱਕ ਹੋਏ ਹੋਣ ਉਸ ਆਤਮਾ ਨਾਲ ਮਿਲੇ ਹੋਣ ਜੋਨਾ ਰਿਪੋਰਟ ਜਾ ਕੇ ਬੈਜੀਆ ਉਹਨਾਂ ਨੂੰ ਮਿਲਿਆ ਹੀ ਹੈ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਵੀ ਮਿਲਦੇ ਬਿਲੇ ਆਇਆ ਹਾਂ ਉਹਨਾਂ ਕੋਲ ਤੁਸੀਂ ਮਿਲਿਆ ਜਾ ਸਕਦਾ ਵੀ ਤੁਸੀਂ ਵੀ ਮਿਲ ਜਾਓ ਤੇ ਤੁਹਾਨੂੰ ਵੀ ਜੋੜ ਦਾ ਤਾਰ ਉਹਨਾਂ ਨਾਲ ਤਿੰਨ ਦਿਨ ਤੋਂ ਲਹੀ ਜੁੜਦੀ ਆਪਣੀ ਅਵੇ ਜੋਲਡਰ ਹੀ ਪਾਣੀ ਜੀ ਸਾਟੇ ਹੱਥ ਕੇ ਉਹ ਕਿ ਮੈਂ ਜੋੜ ਤੈਨੂੰ ਕਹਿਣ ਕੋਈ ਇੱਥੇ ਜੋੜ ਲੈ ਜੋੜਤਾ ਆਇਆ ਜੋੜ ਕੇ ਫਿਰ ਰੱਖਣੀ ਵੀ ਹੈ ਖੋੜੀ ਲਈ ਜਿਵੇਂ ਮਿਲਿਆ ਨਾ ਮਲੇ ਮਲੇ ਜੇ ਮਿਲਿਆ ਹੋਵੇ ਉਹ ਜੇ ਆਪੇ ਮਿਲਿਆ ਹੋਵੇ ਤਾਂ ਹੀ ਆਵੇ ਜੋੜ ਕੇ ਰੱਖੇ ਤਾਂ ਹੀ ਮਿਲਿਆ ਹੋਇਆ ਮਿਲਿਆ ਜੀ ਮਿਲਿਆ ਜੇ ਮਿਲੇ ਜੇ ਅੰਤਰਾਤਮਾ ਕਰਕੇ ਦੋਏ ਮਿਲੇ ਹੋਣ ਦੋਹਾਂ ਦੀ ਸੋਚ ਕੋਬੇ ਉਹ ਤਾਂ ਮਿਲੇ ਹੁੰਦੇ ਨਹੀਂ ਸੱਚਖੰਡ ਵਾਲੇ ਹੋਵੇ ਵੀ ਮਿਲੇ ਹੋਏ ਨੇ ਸੋਚ ਕੇ ਜੇ ਤਾਂ ਇਸ ਤਰੀਕੇ ਨਾਲ ਸੰਕਤ ਕਰਦਾ ਸੁਣ ਕੇ ਤਾਂ ਫੇਰ ਤਾਂ ਇਸ ਤਰ੍ਹਾਂ ਸਰਪਰ ਇਸ ਤਰ੍ਹਾਂ ਸਰ ਉਹਦਾ ਤਰਜਾ ਨੂੰ ਕੋਈ ਰੋਕ ਨਹੀਂ ਸਕਦਾ ਆ ਤਰੇ ਹੋਸ਼ਸ਼ਤ ਗਰੰਟੀ ਦੇਤੀ ਗਰੰਟੀ ਇਹ ਤਾਂ ਨਾ ਗਰੰਟਡ ਹੀ ਪਰਵਾਣੀ ਗਰੰਟੀ ਦਿੰਦੀ ਹੈ ਪਰ ਉਹ ਜਿਹੜੀਆਂ ਗੱਲਾਂ ਨੇ ਉਹ ਸ਼ਰਤਾਂ ਉਹ ਕੋਈ ਯੂਨੀਵਰਸਲ ਨਹੀਂ ਬਣਦੀਆਂ ਦੁਆਈ ਗਰੰਟਡ ਹੈ ਪਰ ਸ਼ਰਤਾਂ ਜਿਹੜੀਆਂ ਨੇ ਉਹ ਨੌਰਮ ਨਹੀਂ ਪਰ ਇਹ ਜ਼ਰੂਰ ਪਰ ਇਹ ਅਜਿ ਮਿਚੜਿਆ ਕੋਈ ਨਹੀਂ ਦੁਆਈ ਗਰੰਟਡ ਹੈ ਲੱਗੇ ਪ੍ਰਭ ਮਿੱਠਾ ਹਾਂ ਜਦੋਂ ਮਨ ਸਾਝ ਜਾਂਦਾ ਸੱਚ ਮਿੱਠਾ ਲੱਗਦਾ ਹੈ ਅੰਤਰਾਤਮਾ ਦੀ ਆਵਾਜ਼ ਮਿੱਠੀ ਲੱਗਦੀ ਹੈ ਫਿਰ ਕੋਈ ਬੜੀ ਦਰ ਆਪਰਾ ਦਰੇ ਆਪਰਾ ਅੰਤਰਾਤਮਾ ਦੀ ਜਿਹੜੀ ਜਿਹੜਾ ਰਾਮ ਰਾਮ ਦਾ ਉਹ ਹੀ ਪ੍ਰਭ ਹੈ ਅਦਲੇ ਦੀ ਵਾਜਿਫੇ ਪਿੱਛੀ ਲੱਗਦੀ ਉਹ ਵਾਜਿ ਵਧੀਆ ਦਿੰਦਾ ਰਿਹਾ ਵਧੀਆ ਦਿੰਦਾ ਜਿਗਿਰ ਆ ਗਈ ਹੈ ਜੇ ਬੁਲ ਸੱਜਿਆ ਆਇਆ ਜੇ ਮਨ ਸਹੀ ਸੱਜਿਆ ਆਇਆ ਫਿਰ ਥੋੜਾ ਜਿਹਾ ਕਈ ਵਾਰ ਕੱਢ ਜੇ ਮਾਰਦਾ ਕੁੱਤੇ ਨੂੰ ਕੰਨ ਕੁੱਤੇ ਨਾਲ ਕੰਨ ਮਾਰਦਾ ਇਹ ਕੰਨ ਮਾਰ ਦਿੰਦਾ ਨਾ ਉਹਦੀ ਗੱਲ ਤੇ ਉਹ ਕੋਈ ਕਾਬੂ ਨੂੰ ਕਹਿੰਦਾ ਤੁਰ ਲੱਗੇ ਤੇ ਕੁੱਤਾ ਕੰਨ ਮਾਰ ਲਓ ਜਦ ਇਹ ਕਹਿੰਦਾ ਵੀ ਐਂ ਕਰ ਲਈਏ ਕਾਬੂ ਦੋਸਲਾ ਕਰਦਾ ਕੰਨ ਮਾਰ ਦਿੰਦਾ ਹੈ ਕੁੱਤਾ ਬਬਾਲਾ ਕੁੱਤਾ ਖਾਨੂ ਕੋਸ਼ ਕਹਿਣਾ ਵਿਚਾਰਾ ਹੱਦ ਵਾਲੇ ਕੁੱਤੇ ਦਾ ਅੰਨਾਲ ਛੱਟਾ ਧਾਰ ਵਾਲਾ ਫੜਿਆ ਸਾਧੂ ਤੇ ਸੰਗਤ ਲੋਕੀ ਕਰਕੇ ਮਤ ਪੁੱਤਾ ਕੇ ਹੈ ਲੋਭਿਆ ਨਾ ਲੋਭਿਆ ਕੰਨ ਮਾਰ ਦਿੰਦਾ ਉਹ ਲੋਭ ਛਡਾਉਣ ਨੂੰ ਕਹਿੰਦਾ ਸਮਝੇ ਉਹ ਕੰਨ ਮਾਰ ਦਿੰਦਾ ਵਸਾਏ ਦੀ ਗੱਲ ਗੱਲਾਂ ਤਾਂ ਸਾਰੀਆਂ ਵਧੀਆ ਸੀਆਂ ਉਹ ਬੜਾ ਨਿਆ ਕੁਝ ਹੋ ਰਿਹਾ ਸਾਧੂ ਕੇ ਸੰਗੇ ਸੰਗੇ ਲੱਗੇ ਪ੍ਰਭ ਮਿੱਠਾ ਸਾਧੂ ਕੇ ਸੰਗੇ ਘਟ ਘਟ ਢਿੱਟਾ ਸਾਧੂ ਦਾ ਜਦ ਸੰਗਤ ਕੀਤੀ ਘਟ ਘਟ ਦੇ ਹਾਲਤਾਂ ਦੇ ਸਾਰਿਆਂ ਦੇ ਬੋਲਦਾ ਘਟ ਘਟ ਢਿੱਟਾ ਉਹ ਲੈਣੇ ਨੂੰ ਇੱਥੇ ਤੱਕ ਲੈ ਗਏ ਨਾ ਇਹ ਆਪ ਵੀ ਤਾਂ ਉਹ ਘਟ ਘਟ ਢਿੱਟਾ ਆਪਣੀ ਵੀ ਗੱਲ ਕਰ ਰਹੇ ਨੇ ਆ ਸਾਧੂ ਦੀ ਸਤਿ ਕੀਤੀ ਹੈ ਆਪਣੇ ਹੱਦ ਵੀ ਕੀ ਸੰਭਾਰ ਰਿਹਾ ਹੈ ਸਾਧੂ ਦੇ ਸੰਗ ਠੜਕੜੀ ਡਿਟਾ ਉਹ ਆਇਆ ਹੈ ਤਾਂ ਠੜਕੜੀ ਡਿਟਾ देखो ਪਹਿਲਾਂ ਇਹ ਗੱਲਾਂ ਨਹੀਂ ਗਈਆਂ ਪਕਤਾਂ ਦੇ ਕਿਉਂਕਿ ਉਹਨਾਂ ਦੇ ਦੂਆ ਚੇਲਾ ਬਣਿਆ ਨਹੀਂ ਤਰੀਕੇ ਤੋਂ ਉਹਨਾਂ ਨੇ ਗੱਲ ਕਹੀ ਵੀ ਨਹੀਂ ਇਸ ਤਰੀਕੇ ਦੀ ਗੱਲ ਕਿਸੇ ਬਗਦਦ ਨਹੀਂ ਕੀਤੀ ਕਦੋਂ ਸੁੱਕ ਤੇਰੇ ਵੀ ਉਹ ਫਿਰ ਦੂਜਾ ਵੀਰ ਤੇ ਤੀਜਾ ਵੀਰ ਹੁੰਦਾ ਵੀ ਉੱਥੇ ਹੋਇਆ ਹੀ ਹੋਇਆ ਹੀ ਹਾਂ ਸਾਧ ਸੰਗੀ ਪਏ ਅਗਿਆਕਾਰੀ ਹਾਂ ਸਾਧ ਸੰਗੀ ਤੇ ਅਗਿਆਕਾਰੀ ਭਈ ਅਗਿਆਕਾਰੀ ਜਿਹੜੇ ਸਾਧ ਸੰਗੀ ਨੇ ਸੰਗੀ ਸੱਦਿਆ ਉਹ ਤਾਂ ਹੁਕਮ ਚ ਨੇ ਵੀਰੇ ਪੰਚ ਸਮਗਲੀ ਵੀ ਉਹ ਲਈ ਉਹ ਆਪੋ ਝਗੜਾ ਪੁੱਤ ਪਾਪ ਵਾਲਾ ਝਗੜਾ ਬੈਠਾ ਸੀ ਉਹ ਸਿਰਾਂ ਲੱਗ ਗਏ ਉਹ ਮੂੰਹ ਪਾਪ ਵਾਲਾ ਜਿਹੜਾ ਸੀ ਨਾ ਕਰਤਾ ਪ੍ਰਗਟ ਕਰਤਾ ਗੁਪਤ ਕਰਤੇ ਵਾਲਾ ਜਿਹੜਾ ਸੀ ਭੇਜ ਦ ਇੱਥੇ ਸੀ ਤਾਂ ਸਾਹਮਣੇ ਧੀਨੇ ਅਸੀਂ ਕਰਦੇ ਬਾਪ ਉਹ ਅਸੀਂ ਕਿਵੇਂ ਮਾਲੀ ਕਰਦੇ ਆ ਸ਼ੰਕਾ ਜਿਹੜੀ ਸੀ ਉਹ ਜਿਹੜਾ ਸੀ ਨਾ ਡੋਰ ਉਹ ਜਿਹੜੀ ਆਣੀ ਖਦਮਾ ਥਾਲੀ ਉਹ ਸੀ ਦੇਖੀ ਕੱਟ ਬੁੱਦਲੇ ਦਾ ਦੇਖ ਲਈ ਸੀ ਉਹਨਾਂ ਨੇ ਦੱਸਦੀ ਵਾਲਾ ਵੀ ਦੇਖਿਆ ਸੀ ਨਾ ਵਾਲਾ ਦਿਖਾ ਫਿਰ ਕਹਿੰਦੇ ਵੀ ਗੱਲ ਠੀਕ ਹੈ ਕਿ ਕਰਾਮਾਤਾਂ ਨਜੌਣ ਵਾਲੇ ਦੀ ਆ ਆਦੇ ਪੁਰਜ਼ੀ ਨੀ ਲੱਜ਼ੀ ਉਹਦਾ ਤੇ ਉਹਗਲੇ ਆਂਡਾ ਅਰ ਕੋਠੇ ਦੇ ਕਰਾਮਾਤ ਹੈ ਹਾਂ ਸਾਧ ਸੰਗੀਪੈ ਆਗਿਆਕਾਰੀ ਸਾਧ ਪੈ ਆਗਿਆਕਾਰੀ ਉਹ ਆਗਿਆਕਾਰੀ ਨੇ ਹੁਕਮ ਦੇ ਵਿੱਚ ਹੈ ਉਹ ਪਾਣੇ ਜਲਦੇ ਨੇ ਪਰ ਮੈਂ ਆਗਿਆਕਾਰੀ ਦੇ ਜੋ ਜੋ ਰੱਖੋ ਪਰ ਉਹ ਤਾਂ ਜ਼ਬਰਦਸਤੀ ਉਹਨਾਂ ਦਾ ਹੈ ਪਰ ਇਹ ਆਪਣੀ ਰਾਜੀਦੂ ਬਾਤ ਸੰਗੀਤਤ ਭਈ ਹਮਾਰੀ ਆਜੇਗਾ ਹੁਣ ਸਦੀਓ ਗੱਲ ਕਰੀ ਗੱਲ ਸੁਣਾ ਲਈ ਗੱਲ ਗੱਲ ਕਰਤੀ ਕੀ ਰਹਿ ਗਿਆ ਕਹਿੰਨਾ ਮੇਰੀ ਵੀ ਗੱਦੀ ਉੱਥੇ ਚੱਲੀ ਆ ਮੈਂ ਵੀ ਕਿਤੇ ਅਟਕ ਕੇ ਸੀ ਪਹਿਲਾਂ ਕੀ ਇਹ ਗੱਲ ਨੂੰ ਨਿਕਾਣਾ ਸ਼ਬਦ ਹੈ ਹਾਂ ਕੀ ਇਹ ਗੱਲ ਨੂੰ ਨਿਕਾਣਾ ਮੇਰੇ ਵੀ ਉਹ ਦਸ ਫਿਰ ਗੱਲ ਤੋੜ ਨੇ ਬਿਰੋ ਉਹਨਾਂ ਬਾਅਦ ਵਾਲੀ ਇੱਕ ਦਵਾਈ ਤਾਂ ਦੇਤੀ ਨਾ ਆਪਣੇ ਮੇਰੇ ਨਾਲ ਹੋ ਗਿਆ ਥੋੜਾ ਨਾਲ ਸਮਝ ਉਹ ਇਸ ਕਰਕੇ ਉਹ ਜਿਹੜਾ ਪਦਾ ਚੱਲਦਾ ਸੀ ਨਾ ਇਹ ਚੱਲੇ ਨੇ ਇਹ ਪਦਾਰ ਸੰਤਦ ਵਾਲਾ ਪਦਾ ਹੀ ਚੱਲਦਾ ਸੀ ਤੇ ਉੱਧਰ ਸੰਤਦ ਜਿਹੜੀ ਹੋਉਤ ੜੀ ਹੋ ਰਹੀ ਹੈ ਚਾਹ ਦੇ ਦਾ ਹੋ ਨਹੀਂ ਉੱਧਰ ਐ ਹੋ ਜਾਂਦਾ ਮੇਰੀ ਗੱਤ ਹੋ ਗਈ ਐ ਦਰ ਦਸੂਤੀ ਨਹੀਂ ਹੋਇਆ ਤੂੰ ਨਾ ਉਸ ਸੈਂਟਰ ਦੀ ਬਾਣੀ ਲੱਗਦਾ ਫਿਰ ਸੋ ਸਾਧਕੇ ਸੰਗੀ ਮਿੱਠੇ ਸਭ ਨੂੰ ਆ ਸੰਤੇ ਮਾਣਾ ਆਪਣਾ ਸਾਧ ਲੈ ਸਾਡੇ ਰੋਗ ਮਟ ਗਏ ਮੇਰੇ ਅੰਦਰੋਂ ਉਹ ਮੇਰੇ ਅੰਦਰੋਂ ਉਹ ਸੀ ਇੰਟਰਨੈਟ ਆਪ ਸੀ ਸਭ ਗਏ ਨਾਲਕ ਸਾਧ ਭੇਟੇ ਸੰਯੋਗ ਨਾਲ ਕੰਨਾ ਮੈਂ ਸਾਤ ਅਜਿਹੜੀ ਭੇਟਾ ਹੁੰਦੀ ਹੈ ਤਾਂ ਸੰਯੋਗ ਹੈ ਸਾਦਾ ਮਿਲ ਜਾਣਾ ਇੱਕ ਸੰਜੋਗ ਇੱਕ ਜੋਗ ਹੁੰਦਾ ਤੇ ਸੰਜੋਗ ਹੁੰਦਾ ਸੰਜੋਗ ਦੀ ਨਿਸ਼ਾਨੀ ਹੈ ਸਾਦਾ ਮਿਲ ਜਾਣਾ ਮਿਲ ਜਾਣਾ ਇਹ ਐ ਵੀ ਹੁਣ ਘਰ ਚਲੇ ਜਾਵਾਂਗੇ ਵਿਛੜੇ ਦੂਰੋਂ ਮਿਲ ਆ ਬਿਠੇ ਇਤੋਂ ਵੱਡਾ ਜੋਗ ਇਹ ਨਹੀਂ ਕੋਈ ਹੋਰ ਸ੍ਰੇਸ਼ਟ ਸਾਦੋਂ ਸ੍ਰੇਸ਼ਟ ਹੋਗਾ ਇਹ ਤੋਂ ਉੱਪਰ ਹੋਰ ਕੋਈ ਉਪਲਬਧ ਕੋਈ चीज ਮਿਲ ਨੂੰ ਹੋਰ ਰਹਿ ਨਹੀਂ ਜਾਂਦੀ ਇਹ ਦੋ ਉੱਪਰ ਸੰਸਾਰ ਚ ਜਿਹੜੇ ਕੰਮ ਆਇਆ ਉਹਦੋਂ ਮਿਲ ਨੂੰ ਹੋਰ ਕੁਛ ਨਹੀਂ ਰਹਿ ਗਿਆ ਜਿਨ੍ਹਾਂ ਲੋਕਾਂ ਨੂੰ ਗੁਰਬਾਣੀ ਨਹੀਂ ਮਿਲੀ ਗੁਰਬਾਣੀ ਨਾਲ ਨਹੀਂ ਜੁੜੇ ਹੋਏ ਇਹ ਹਿੰਦੁਸਤਾਨ ਜਿਹਦੀ ਪੈਦਾ ਹੋਏ ਸਿੱਖਾਣੇ ਦਾ ਜਿਹਦੀ ਪੈਦਾ ਹੋਏ ਉਹਨਾਂ ਦਾ ਸੰਜੋਗ ਕਿਵੇਂ ਹੋਵੇ ਕਈਆਂ ਦਾ ਫਿਰ ਵੀ ਸੰਜੋਗ ਹੋ ਜਾਂਦਾ ਕਈਆਂ ਦਾ ਸਿੱਖਾਣੇ ਦਾ ਪੈਦਾ ਹੋ ਕੇ ਨਹੀਂ ਉੱਥੇ ਗੁਰੂ ਘਰ ਚ ਪੈਦਾ ਹੋ ਗਿਆ ਜੀ ਸੰਯੋਗ ਹੋਇਆ ਸੰਯੋਗ ਤਾਂ ਜਦਿਆ ਜਦ ਉਹ ਆਪਣਾ ਸਫਲਾ ਹੋ ਜਾਂਦਾ ਹੈ ਮਨ ਸਾਧ ਲੈਤਾ ਹੈ ਪਰ ਇਹ ਵੀ ਸੰਯੋਗ ਆ ਉਹਨੂੰ ਚਾਂਸ ਮਰਸਾ ਦਾ ਹੁੰਦਾ ਪੂਰਾ ਬੜ ਜਾਂਦਾ ਜੇ ਕਲਮ ਚਾਹੇ ਸੰਯੋਗ ਨੂੰ ਜੇ ਹੋ ਉਹ ਨਾਲਵੇ ਜੇਬਦ ਪਾਲਵੇ ਤਾਂ ਤਰ ਜਾਂਦਾ ਸੰਯੋਗ ਵਾਸਤੇ ਜਿਵੇਂ ਆਪਾਂ ਕਹਦੇ ਨੇ ਕਿ ਸੰਯੋਗ ਹੋਏ ਸੀ ਇਸ ਸੰਯੋਗ ਵਾਸਤੇ ਹੋ ਗਿਆ ਇਹ ਮਿਲ ਕੇ ਉਹ ਸੰਯੋਗ ਦਾ ਅਸੀਂ ਗਲਤ ਇਸ ਸਮਝ ਕਰਦੇ ਅਚਾਨਕ ਕਹਿ ਸਰਦੇ ਆਓ ਵਾਈਟ ਚਾਂਸ ਕਹਿੰਦੇ ਆਹ ਵਾਈਟ ਚਾਂਸ ਇਹਨਾਂ ਜਨਮ ਜਨਮ ਦੀ ਸੋਚ ਜਾਂਦੇ ਹਾਂ ਨਾਲ ਹੀ ਸੰਬੰਧਤ जब ये दोइले ओता होया ए संयोग लफज है ना साथ भेटे संयोग है भेट हो गए बहुत मतलब हो गया मेल हो गया साथ रहो आ जाओ लेना जा रहे हैं संयोग करता परमेश्वर ने गुरु नानक गुरु नानक आया वो नानक उतरेगा भाई इस संयोग ਉਦੇ ਬਾਅਦ ਤੇ ਸੰਜੋਗ ਹੋ ਗਿਆ ਨਾਲ ਦੇ ਵਾਸਤੇ ਨੂੰ ਹੋਇਆ ਮੇਰੇ ਦਾ ਸਾਰੇ ਹੀ ਨੇ ਉਹ ਗੁਰਪਤ ਪੂਰਾ ਜਾਂਦਾ ਦੀ ਉੱਤੇ ਸਭ ਸਰ ਪੈ ਗਿਆ ਭੇਟਿਆ ਹੀ ਉਹ ਕਹਿੰਦਾ ਤਾਂ ਇਹਦਾ ਜੇ ਤਾਂ ਨਾਲ ਪਾਸ ਭੇਟਿਆ ਹੋਈ ਆ ਜਾ ਚਾ ਉਹਨੇ ਨਹੀਂ ਕੀਤੀ ਹੈ ਉਹਨੇ ਉਹਨੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਨੂੰ ਮੇਟ ਗਏ ਨੇ ਹਾਂ ਅੰਤਲਪ ਇਹ ਇੱਕ ਦੂਏ ਨਾਲ ਗੱਲਬਾਤ ਕਰਦੀ ਉਹ ਭੇਟ ਹੈ ਉਹ ਗੱਲਬਾਤ ਦਾ ਬਿਲ ਜਾਣਾ ਇੱਕ ਮਤ ਹੋ ਜਾਣਾ ਤਾਂ ਭੇਟ ਹੈ ਲਾਪ ਦਾ ਨਾ ਭੇਟ ਹੈ ਕਿਪ ਸਜੋਬ ਸੀ ਕੋ ਪੂਰਬ ਦਾ ਕਰਿਆ ਉਹ ਗੱਲ ਆਏ ਬੀ ਬੰਦੂ ਕਰਿਆ ਓਏ ਇਮਾਨਦਾਰੀ ਨਾਲ ਕਰ ਰਿਆ ਸੀ ਹੈ ਜੀ ਇਮਾਨਦਾਰੀ ਨਾਲ ਤੱਕ ਹੁੰਦਾ ਪਾਲਣ ਕਰ ਰਿਆ ਸੀ ਜੋ ਸੁਣਿਆ ਸੀ ਲੈਣਾ ਹੋਣ ਪਰਮੇਸ਼ਰ ਨਾਲ ਕਹ ਬਜਾ ਰੋ ਨੂੰ ਪਤਾ ਤਾਂ ਹੈ ਜੀ ਕਰਦਾ ਇਮਾਨਦਾਰੀ ਨਾਲ ਉਦੇ ਅੰਦਰ ਉਹ ਥੋੜੀ ਹਾਲਾਤੀ ਤਾਰ ਜੀ ਉਹਦਾ ਨਾਂ ਨੂਰ ਮਿਲਿਆ ਪਹਿਲਾਂ ਕਾਹਤੇ ਕਾਹਤੇ ਨਾਟਕ ਦੀ ਗੱਲ ਚੱਲੀ ਗਈ ਕਿਸੇ ਨਾਰਾਜ ਹੋ ਕਹਿੰਦੇ ਚੱਲ ਉਹਨੂੰ ਬੱਤੀ ਚਾਹੁੰਦੇ ਆ ਰਾਤ ਉਸੇ ਕੱਟਾਂਗੇ ਅੰਦਰ ਪਾਣੀ ਛਕਾਂ ਗੱਲਬਾਤ ਕਰਾਂ ਕਹਨੂੰ ਨਾ ਵੀ ਜਾਂਦੇ ਉਥੇ ਪਤੰਸੀ ਰਾਵੀ ਦਾ ਪਰ ਇਹ ਉਹ ਸੋ ਉੱਥੇ ਚਲੇ ਉਸ ਬਾਗ ਵਿੱਚ ਉਹ ਰਸੇ ਉਹੀ ਨੂੰ ਤੇ ਨੂੰ ਨੂੰ ਬਰੇ ਨਾਲ ਚਲੇ ਜਾਂਦੇ ਰਵੀ ਦੇ ਫਿਰ ਨਾਲ ਨਾਲ ਦੇ ਕਨਾਰੇ ਦੇ ਰਸਤੇ ਉੱਤੇ ਪਾਣੀ ਕਰਕੇ ਉਹ ਪਰੇ ਜੰਮੂ ਵੀ ਜਾਂ ਸੀ ਐ ਇੱਥੋਂ ਪਾਰ ਹੋ ਜਾਈਏ ਕੋਈ ਘਾਣੇ ਅੱਗੇ ਪਾਰ ਹੋ ਪਾਤਾ ਹੋਣਾ ਹੀ ਪੈਣਾ